ਜਗੁਨਾ ਰਾਮ ਰਾਮ ਕੋ ਤਸਵੀਜਾ ਕੇ ਫਿਰ ਤੇ ਚੱਲੋ ਕੁਲ ਮਲਾ ਕੇ ਗੱਲ ਇੱਥੇ ਆ ਜਾਂਦੀ ਹੈ ਕਿ ਜਦੋਂ ਵੀ ਗੁਰਮਤ ਪ੍ਰਗਟ ਹੁੰਦੀ ਹੈ ਗੁਰਬਾਣੀ ਪ੍ਰਗਟ ਦੇ ਅਰਥ ਪ੍ਰਗਟ ਹੁੰਦੇ ਨੇ ਪਰ ਬਾਣੀ ਤਾਂ भी है साड़े ਸਾਡੇ ਕੋਲ ਪਰ ਅਰਥ ਸਾਡੇ ਕੋਲ ਨਹੀਂ ਹੈ ਤਕਰੀਬਨ 250 ਸਾਲ ਪਹਿਲੇ ਉਹ ਤੋਂ ਪਹਿਲਾਂ ਜਿਹੜੇ ਆਦਮੀ ਅਰਥ ਸਮਝਦੇ ਸੀ ਜਿਨ੍ਹਾਂ ਨੂੰ ਗੁਰੂ ਘਰ ਤੋਂ ਸਮਝਾਏ ਗਏ ਸੀ ਉਹ ਆਦਮੀ ਇੱਕ ਇੱਕ ਕਰਕੇ ਸਾਰੇ ਖਤਮ ਕਰਦੇ ਉਹਦੇ ਚ ਕੌਣ ਸੀ ਖਤਮ ਕਰਨ ਉੱਚ ਉਹ ਸੀ ਜਿਨ੍ਹਾਂ ਦੀ ਮਤਾਂ ਨੂੰ ਗੁਰਬਾਣੀ ਨੇ ਸਿੱਖਿਆ ਦਿੱਤੀ ਸੀ ਸਿੱਧੇ ਰਸਤੇ ਤੇ ਚੌੜੀ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦਾ ਜੀਵਨ ਖਰਾਬ ਨਾ ਹੋਵੇ ਇਹ ਆਪਣੇ ਜੀਵਨ ਦਾ ਪੂਰਾ ਫਾਇਦਾ ਲਾਭ ਉਠਾ ਲੈਣ ਉਹ ਮਤਾਂ ਦੇ ਨੇ ਜਿਵੇਂ ਪੰਡਤ ਸੀ ਜੇ ਲੋ ਹਿੰਦੂ ਬਤ ਕਹਨੇ ਸਰਾਤ ਨਹੀਂ ਮਤ ਇਹਦੇ ਵਿੱਚ ਜੋਗੀ ਨੇ ਸੰਿਆਸੀ ਨੇ ਉਦਾਸੀ ਨੇ ਸਾਰਿਆਂ ਦਾ ਜ਼ਿਕਰ ਆਉਂਦਾ ਰਿਹਾ ਨਹੀਂ ਇਸਲਾਮ ਵਾਲੇ ਵੀ ਨਹੀਂ ਇਸਲਾਮਤ ਵੀ ਸੀ ਜੇ ਨਹੀਂ ਜੇਕਰ ਤਾਂ ਐਸਾਈ ਮਤ ਦਾ ਜ਼ਿਕਰ ਨਹੀਂ ਹੈ ਬਹੁਤਾ ਬੋਲਦੀ ਬਸਰ ਜ਼ਿਕਰ ਨਹੀਂ ਹਿੰਦੁਸਤਾਨ ਚ ਬਤ ਹੈ ਨਹੀਂ ਸੀ ਉਹ ਗੱਲ ਕੀਤੀ ਹੋਈ ਆ ਥੋੜੀ ਜਿਹੀ ਬੁੱਧ ਦੀ ਕਿਤੇ ਸਿੱਧ ਬੁੱਧ ਨਾਥ ਕਹਤੇ ਕਿਤੇ ਦੇਵੀ ਆ ਬੁੱਧ ਮੰਨਦਾ ਨੂੰ ਮੰਨਦਾ ਜਿਹੜਾ ਮੰਨਦਾ ਗੱਲ ਵੀ ਕੀ ਕਰਨੀ ਸੋ ਦਾ ਆ ਰੋਦਾ ਜੀ ਕੀਤਾ ਜਾ ਸਕਦਾ ਜਿਹਦੇ ਵਿੱਚ ਸੁਧਾਰ ਨਹੀਂ ਗਿਜਾਇਸ਼ ਹੋਵੇ ਤੂ ਜੰਗੀਏ ਟਾਇਰ ਚੰਗਾ ਪੈਂਚਰ ਹੋ ਗਿਆ ਪੈਂਚਰ ਲਾਇਆ ਜਾਉ ਜਿਉ ਹੋਈ ਨਹੀਂ ਹੈ ਤਾਂ ਪੈਂਚਰ ਲਾ ਕੇ ਹਵਾ ਭਰਨਾ ਸਵਾਲ ਹੈ ਪਹਿਲਾਂ ਨੂੰ ਉਹ ਤਾਂ ਇਸ ਗੱਲ ਨੂੰ ਮੰਨਦਾ ਹੀ ਨਹੀਂ ਹੈ ਬਿਆਸ ਕੋਲ ਦੀ ਤੇ ਉਦੋਂ ਫਿਰ ਚਾਚਾ ਵੀ ਕੀ ਕਰੀਗੇ ਜਿਹੜਾ ਮੰਨਦਾ ਹੋਵੇ ਆਤਮਾ ਹੈ ਪਰਮਾਤਮਾ ਹੈ ਪਰ ਉਹਨੂੰ ਪਤਾ ਨਾ ਹੋਵੇ ਪਰਮਾਤਮਾ ਕੀ ਹੈ ਉਹਨੂੰ ਸਮਝਾ